ਸਲੋਕ ਮਹੱਲਾ ਤੀਜਾ ਗੋੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਭਾਣੇ ਚੱਲੇ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਰਾਗ ਜਿਹੜੇ ਦੇਖਣਾ ਹੈ ਬਾਰੇ ਵੀ ਗੁਰਮਤਿ ਸੌੜੀ ਰਾਸ ਤੇ ਵਿਕਲ ਅਫੀ ਐਕਸਪਲੇਨ ਕਰਦੀ ਹੋਵੇ ਕੋਈ ਕਾਹ ਵੇਦੋ ਸੌੜੀ ਰਾਸ ਤਿ ਸਤਨ ਦੇ ਵਿੱਚ ਜਦੋਂ ਆਦਮੀ ਦੀ ਸੋਚ ਧਿਆਨ ਪਾੜੇ ਦਾ ਧਿਆਨ ਪਾੜੇ ਜਾਂ ਸ਼ੁਰੂ ਤੇ ਜਿਵੇਂ ਪਹਿਲਾਂ ਸਾਡਾ ਫਰਮਾਇਆ ਜਿ ਧਿਆਨ ਅਹ ਜੇ ਦੀ ਗੁਰਤੀ ਦੇ ਵਿਕਿਆਨ ਫਿਰ ਜਲੋ ਪੁਰਤੀ ਪੂਜਾ ਕਰਦੇ ਨਾ ਲੋਕ ਦੁਆਇਆ ਵੀ ਸਰੀਰ ਦੀ ਬਾਹਲੇ ਸਰੀਰ ਦੀ ਪੂਜਾ ਕੀ ਨਾ ਹੋ ਠੀਕ ਹੈ ਗੜ ਪੂਜਾ ਇਹ ਸਦੋ ਚੇਤਨ ਕਰਨਾ ਹੈ ਅਸੀਂ ਬਾਹਰ ਚੇਤਨ ਵੱਲ ਧਿਆਨ ਕਰਨਾ ਉਹ ਗੌਰ ਜਿਹੜੀ ਸਾਡੀ ਧਿਆਨ ਪਹੁੰਚ ਗਿਆ ਜੀ ਧਿਆਨ ਪਾੜਦੇ ਵੇ ਉਹਦਾ ਗੌੜੀ ਨਾਲ ਸ਼ੁਰੂ ਹੋ ਗਿਆ ਉਹ ਸੁਲਖਰੀ ਹੁਣ ਲਖਣ ਤੇ ਅੱਗੇ ਆਪਾਂ ਵੀ ਇਹ ਲੱਛਣ ਦੀ ਗੱਲ ਕਰਦੇ ਲੱਛਣ ਉਹ ਇਹਦਾ ਰਿਜ਼ਲਟ ਜਿਹੜਾ ਤੇਰਾ ਧਿਆਨ ਜਿੱਧਰ ਆਪਾਂ ਬੱਚੇ ਨੂੰ ਗੱਲ ਹੀ ਹੈ ਜਿੱਧਰ ਤੇਰਾ ਪਾਈ ਧਿਆਨ ਉਹ ਪੜਾਈ ਵੱਲ ਤੇ ਪੜਾਈ ਕਰਦੀ ਸੀ ਤੂੰ ਤੇਰਾ ਧਿਆਨ ਪੜਾਈ ਵੱਲ ਹੈ ਜੀ ਫੇੜ ਵਾਲਾ ਹੈ ਕਿਸੇ ਹੋਰ ਪੜਾਈ ਵੱਲ ਨਹੀਂ ਹੈ ਹੋਰ ਕਿਤੇ ਵੀ ਹੋਵੇ ਇਹ ਲੱਛਣ ਠੀਕ ਨਹੀਂ ਹੁੰਦੇ ਇਹਦਾ ਰਿਜ਼ਲਟ ਠੀਕ ਨਹੀਂ ਹੁੰਦਾ ਗੋੜੀ ਰਾਜ ਦੇ ਚੁਰੂ ਫੋਜ ਵੇ ਕਿਸੇ ਦੀ ਧਿਆਨ ਬਦਲ ਜਵੇ ਪਸਟੀ ਹੋਵੇ ਮਾਇਆ ਤੋਂ ਉੱਪਰ ਚਲਾ ਜਾਵੇ ਚੁਰੂ ਉੱਠ ਜਵੇ ਕੇ ਮਾਇਆ ਤੋਂ ਪਰੋੜ ਰਿਹਾ ਨਾ ਭਾਇ ਹੈ ਨੀ ਭਗਤ ਸੁਖ ਸਾਗਰ ਗੋੜੀ ਅੱਛਾ ਜੀ ਸੁਖ ਸਾਗਰ ਦੇ ਅੰਦਰ ਜੇ ਜੋਰ ਦੇ ਅੰਦਰ ਹੈ ਪਰ ਵਿਸ਼ਵ ਤਾਂ ਵਿਆਪੀ ਹੈ ਰਚਨਾ ਸਰਵ ਵਿਆਪੀ ਹੈ ਜੀ ਰਚਨਾ ਸੀ ਸਰਵ ਵਿਆਪੀ ਹੈ ਮਾਇਆ ਤੋਂ ਪਰੇ ਜਰਨਲ ਕਲ ਕਰਦੇ ਹਾਂ ਉਸ ਤੌਰ ਭਾਸ਼ਾ ਮਾਇਆ ਤੋਂ ਪਰੇ ਇਹ ਤਾਂ ਮਤਲਬ ਜਿਵੇਂ ਇੱਕ ਆ ਉਹਦੇ ਪੇਟ ਦੇ ਵਿੱਚ ਅੰਡਾ ਅੰਡਾ ਤਾਂ ਮੁੱਕ ਗਿਆ ਪੇਟ ਦੇ ਵਿੱਚ ਗੁਰਦੀ ਤਾਂ ਫਿਰ ਅੱਲੇ ਵਾਲੇ ਬਾਹਰ ਆਇਆ ਮੈਂ ਛੋਟਾ ਜਿਹਾ ਹੀ ਪਸਾ ਇਹ ਜਿਹੜਾ ਹੰਦ ਹੈ ਨਾ ਉੱਪਰ ਬੰਦ ਜੀ ਪਰ ਭੰਟ ਜੀ ਪਹਿਲੇ ਬਰ ਭੰਟ ਜੇ 2 ਲੱਖ ਦੇ ਬਰ ਜਿੰਨਾ ਆਕਾਸ਼ ਹੈ ਸਰਤੀ ਦੇ ਰਚਨਾ ਵਾਲੀ ਜੀ ਦੀ ਜਗ੍ਹਾ ਹੋਈ ਹੈ ਪਭ ਸਾਧਨ ਸੁਖ ਸਾਧਨ ਸਰਬੱਤ ਦਾ ਹੈ ਪਭ ਸਾਧਨ ਸੁਖ ਸਾਧਨ ਬੋਲੇ ਜਦ ਪਭ ਸਾਧਨ ਤੋਂ ਛੁੱਟ ਕੇ ਜਦ ਬਾਹਰ ਚਲੇ ਜਾਂਦੇ ਉੱਪਰ ਉਹ ਸੁਖ ਸਾਧਨ ਨੂੰ ਛੁੱਟ ਜਾਂਦੇ ਅਸਲ ਵਿੱਚ ਬਾਹਰ ਤੋਂ ਪਰੇ ਦੀ ਗੱਲ ਇਹ ਹੈ ਉਹਦਾ ਧਿਆਨ ਰੁਕ ਜਾਂਦਾ ਕਿਵੇਂ ਜਾਂਦਾ ਉਹ ਐਂ ਜਾਂਦਾ ਜਿਵੇਂ ਪ੍ਰਕਾਸ਼ ਜੈਸੇ ਧਰੂ ਉੱਪਰ ਆਕਾਸ਼ ਜੇ ਦਰਮਦਰ ਭਰਮ ਦਾ ਅੰਸ਼ ਰਹਿਣਾ ਹੀ ਨਹੀਂ ਮਾਇਆ ਤੋਂ ਪਰੇ ਚੱਲ ਜਾਈਂ ਫਿਰ ਤਾਂ ਚੱਲ ਲਈ ਦੇ ਵਿੱਚ ਵਿੱਚ ਹੀ ਭਰਮ ਤੇ ਰਹਿ ਪਰਮਦਾ ਹੀ ਤੇ ਰਹਿ ਗੋਲੀ ਰਾਗ ਦਾ ਗੁੱਤ ਲਵੇ ਹੈ ਕਿ ਮਾਇਆ ਤੋਂ ਉੱਪਰ ਉੱਠ ਕੇ ਕੋਈ ਨਾ ਹੋ ਜੂਗਾ ਜੀ ਇਧਰੋਂ ਫਟ ਕੇ ਉਧਰ ਲਾ ਸਕੋਗੇ ਸੇ ਗੋੜੀ ਨਾਲ ਸਿਰੂਪ ਤੇ ਗੋੜੀ ਰਾਗ ਦੇ ਗੱਲ ਗੋੜੀ ਰਾਗ ਕਰ ਲੂ ਜੋ ਕੰਮ ਕਰਨਾ ਆਇਆ ਉਹ ਪੂਰਾ ਹੋ ਇਹ ਗੇ ਚੰਦੇ ਰਸਤੇ ਪੈ ਗਿਆ ਕਿਸੇ ਕਰਮ ਦੇ ਫਸਾਵਾ ਲੈ ਲੱਖੜੀ ਹਾਂਜੀ ਜੇ ਖਸਮੈ ਚਿਤ ਕਰੇ ਤਾਂ ਸਤਿ ਲਖ ਇਹ ਇੱਕ ਖਸਬ ਦੇ ਤੇ ਗੁਰਬਾਣੀ ਚੋਂ ਲਵੋ ਇਹ ਸੱਚ ਸਭ ਨਾਲ ਦਾ ਖਸਬ ਸੱਚ ਨਾਲ ਚਿਤ ਜੁੜਦੀ ਵਾਯਾ ਝੂਠ ਹੈ ਇਹ ਤਾਂ ਜਿਹੜਾ ਹੈ ਜਿਹੜਾ ਜਪਦਾ ਵਰਦਾ ਹੈ ਮਰਦਾ ਹੀ ਦੀਵਰਵਾ ਨੇ एवरी ਵਾਰਦਾ ਵੀ ਸੱਚ ਸਤਿ ਸਰੂਪ ਹੈ ਜੋ ਬੋਲਦਾ ਕੋਰ ਖਾਸ ਕਰੋ ਬੋਲੇ ਸਤਿ ਸਰੂਪ ਪਰਮਤੱਤਵ ਦੇ ਰੂਪ ਉਹਦੀ ਦੇਖ ਰੂਪ ਸ਼ਰੀਰ ਦੀ ਦੇਖ ਰੂਪਾ ਜੋ ਵੀ ਫੋਟੋ ਵਾਲੇ ਸ਼ਰੀਰ ਦੀ ਗੁਰਗੁੱਦਲੇ ਦੀ ਹੁੰਦੀ ਗੱਦੀ ਦੀ ਗੱਲ ਉਦੇ ਨਾਲ ਜੋੜੇ ਚਿੱਤ ਸੱਚ ਸੁਰੂਪ ਦਾ ਹੈ ਆਤਮ ਤੇ ਹੱਦੀ ਹੋਵੇ ਇਹ ਕਹ ਲੋ ਆਤਮ ਤੇ ਹਾਂ ਤਾਂ ਕਿਹ ਕੋਟ ਆਤਮ ਪਿਆਰ ਆਤਮ ਤੇ ਵੀ ਹੋ ਜਵੇ ਠੀਕ ਹੈ ਆਪਣੇ ਆਪ ਨਾਲ ਜੁੜੇ ਮੈਂ ਆਪਣੇ ਨਾਲ ਜੁੜ ਜਿਵੇਂ ਜੇ ਰੌਣੀ ਰਾਗ ਤਾਲ ਸੁਣ ਜੇ ਕੋਈ ਹੋਰ ਚੀਜ਼ ਗਾਵੇ ਨਾ ਕੋੜੀ ਰਾਗ ਚੋਦੀ ਬੋਲ ਖੜੀ ਵੀ ਗਾ ਸਕਦੇ ਆਪਾਂ ਗਾਂਤ ਵਿੱਚ ਤੋਂ ਕੁਝ ਵੀ ਗਾ ਸਕਦੇ ਹਾਂ ਇੱਥੇ ਰਾਗ ਦੇ ਪਰ ਜੇ ਸੱਚੀ ਬਾਣੀ ਗਾਵੇ। ਜਾਂ ਗੁਰਬਾਣੀ ਗਾਵੇ। ਹੋਜੀ। ਭਾਣੇ ਚੱਲੇ ਸਤਿਗੁਰੂ ਕੈ। ਐਸਾ ਸ਼ਿੰਗਾਰ ਕਰੇ। ਸ਼ਿੰਗਾਰ ਕਾਉਂ ਦਾ। ਸ਼ਿੰਗਾਰ ਕਿ ਕੀ ਹੋਊਗਾ। ਸ਼ਿੰਗਾਰ ਹੋਊਗਾ ਜਦ ਸਦਲ ਗੁਣਾਂ ਦਾ ਹਾਰ। ਜਦ ਹਾਰ ਪੈ ਜੂਗਾ ਸਾਰੇ ਗੁਣਾਂ ਦਾ ਗੱਲ 'ਚ। ਉਹ ਕੀ ਹੈ ਇੱਕ ਸਤਨਾਮ ਕਰਤਾ ਪੁਰਖ ਡੇਰ ਪਉ ਨਿਰਵੈਰ ਧਾਲੂ ਜੁੰਦੀ ਸਾਇਪੰਦ ਸਾਰੇ ਅੱਠੇ ਮਹਾਂ ਦਾ ਹਾਰ ਪੈ ਜੂ ਫਿਰ ਕਾਇਆ ਸਾ ਵੀ ਹੋਈ ਅਸ਼ਟਵੇਂ ਅਸ਼ਟ ਧਾਤ ਕੀ ਕਾਇਆ ਸਰੀਰ ਗਾਇਬ ਹੋ ਜੂ ਪੁੰਦਰ ਸਰੀਰ ਪ੍ਰਗਟ ਹੋ ਜੂ ਅਸ਼ਟਵੀਂ ਧਾਤ ਕੀ ਮੈਂ ਅਪੁਲ ਆਇਆ ਇੱਕ ਵੀਰ ਨੇ ਗੋੜੀ ਰਾਖੇ ਕਹੀ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ 라ਵੇ ਜਿਉ ਉਬਲੀ ਮਜੀਠੇ ਰੰਗ ਗਹਿ ਗਹਾ ਕਿਉ ਸੱਚੇ ਨੂੰ ਜਿਉ ਦੇ ਹੁਣ ਪਧਾਰ ਖਸੂਬੂ ਆੜ ਗੱਲ ਆਗੀ ਠੀਕ ਹੈ ਪਧਾਰ ਖਸੂਬੂ ਕਹਿੰਦੇ ਕਹਿੰਦੇ ਜਿਨੂੰ ਅਸੀਂ ਖਾਸ ਕਿਹਾ ਕੀ ਹੈ ਉਹ ਪਧਾਰ ਕਿਉ ਸੱਚਾ ਸ਼ਬਦ ਹੈ ਜਿਹੜਾ ਇਹ ਹੁਕਮ ਜਿਹੜਾ ਕਹਿੰਦਾ ਜਿਹੜਾ ਪਹਿਲਾਂ ਸਨਾ ਤੇ ਪਾਣੀ ਸੋਲਦੀ ਏ ਟਰਕੀਵਾਲ ਨੂੰ ਉਹੀ ਪਹਾਰ ਹੈ ਫਿਰ ਉਹਦੇ ਨਾਲ ਸਦਾ ਹੀ ਰਵਿਆ ਰਹਿਣਾ ਜੁੜਿਆ ਰਹਿੰਦਾ ਫਿਰ ਜੰਮਣ ਫਿਰ ਸਦਾ ਜੀਵਨ ਕੋ ਜਾਂਦਾ ਹੈ ਸਦਾ ਹੀ ਰਹਿੰਦਾ ਕਿਤੇ ਨੀਂਦ ਨਹੀਂ ਆਉਂਦੀ ਸਾਨੂੰ ਨੀਂਦ ਆਉਂਦੀ ਹੈ ਗੁਰਮੁਖ ਜਾਗੈ ਦੀਦ ਨਾ ਸੋਵੇ ਸਦਾ ਸਹਾਰਾ ਦਾ ਸੋਧੀ ਬੁੱਧ ਹੋ ਜਾਂਦੇ ਇਹ ਬੇਗੁਲ ਬੁੱਧ ਜਦੋਂ ਉਹ ਦਾ ਸਾਰੀ ਸੋਝੀ ਹੋ ਜਾਂਦੀ ਹੈ ਪੂਰੀ ਸੋਝੀ ਹੋ ਜਾਂਦੀ ਹੈ ਜਿਹਨੂੰ ਕਬੀਰ ਤੇ ਪਾਖਾ ਕਹਿੰਦਾ ਭ੍ਰਮ ਗਿਆਨ ਦੀ ਕੰਮਤ ਪਰ ਆਕਾਸ਼ ਉਦੋਂ ਤੇ ਫਿਰ ਗੁਰਮੱਤ ਦੇ ਉੱਤੇ ਹੋਰ ਕੋਈ ਗਿਆਨ ਨਹੀਂ ਚੜਦਾ ਅਸਨ ਹੋਰ ਬੱਤਾ ਮੇਰਾ ਛੋਟ ਵੀ ਤੱਲੇ ਬੱਤਾ ਨਾ ਰੰਗ ਚੜਦਾ ਅਸੀਂ ਡਿਵੈਲਪ ਕਰ ਰਹੇ ਹਾਂ ਆਧਵੀ ਡਿਵੈਲਪ ਕਰ ਰਹੇ ਹੈ ਤੇ ਉਹਨਾਂ ਦਾ ਖੋਜੀ ਕਿਹਦੇ ਨੇ ਜਿਹੜੇ ਆਪਣੀ ਦੀਵਸੀਆਂ ਦੇ ਵਿੱਚ ਡਾਕਟਰ ਨੇ ਤੇ ਇਹ ਕਿਰਨਾਲਰ ਮਤਾਂ ਵਰਡ ਦੇ ਵਿੱਚ ਹੋ ਚੁੱਕੀ ਹੈ ਤੋੜ ਗਈ ਹੁਣ ਤਾਂ ਤਨਹਾਰ ਹੈ ਨਹੀਂ ਹੈ ਜੀ ਬਹੁਤ ਸਾਰੀਆਂ ਜਿਹੜੀਆਂ ਹੁੰਦੀ ਕਿਸੇ ਵੇਲੇ ਸੀ ਆਦਮੀ ਦਾ ਗਿਆਨ ਡਿਵੈਲਪ ਹੋ ਗਿਆ ਤੇ ਕਹਿ ਲੋ ਜੀ ਆਜੀ ਬੁੱਧੀਵਾਦ ਹੋ ਰਿਹਾ ਦਿਲ ਕੋਲ ਦੇਖੋ ਸਾਈਕਲ ਤੇ ਉਹ ਰੁਕਾਇਆ ਤੇ ਡਰੇ ਜਾਏ ਕਿਉਂਕਿ ਰੇਡਰ ਨੂੰ ਆਪਣੇ ਸਿਆਣੇ ਸੁਪੀਰ ਸਮਝਦੇ ਜਿਨ ਪੜ੍ਹੇ ਲਿਖੇ ਸਿਆਣੇ ਨੇ ਪੜ੍ਹੇ ਲਿਖੇ ਕਿਵੇਂ ਹੁਣ ਆਦਮੀ ਜਿਹੜਾ ਹੈਗਾ ਬੱਚੇ ਰੋਹਾਂ ਤੇ ਘਰ ਬੁੱਧੀ ਤੇ ਵੱਲ ਫੁੱਟੀ ਜਾਂਦੀ ਹੈ ਇਹਨੂੰ ਗੁਰਬਤ ਦਾ ਗਿਆਨ ਬਹੁਤ ਸਪੀਅਰ ਹੈ ਇਹਦੀ ਭੁੱਖ ਬਹੁਤ ਜਾਗੀ ਹੋਈ ਹੈ ਕਿਉਂਕਿ ਆਦਮੀ ਦੇ ਅੰਦਰ ਅਸਲ ਵਿੱਚ ਭੁੱਖ ਗਿਆਨ ਦੀ ਹੋਇਆ ਪਰ ਸਾਨੂੰ ਪਤਾ ਨਹੀਂ ਹੈ ਵਰਦਾਰੀ ਹੈ ਤਾਂ ਹੀ ਲੋਕ ਤਾਂ ਉਹਨੂੰ ਪਾਏਦੇ ਪ੍ਰਭਾਵਤ ਰਹੇ ਸਰਬੋਤਮ ਗਿਆਨ ਉਹਦੇ ਵਿੱਚ ਸਾਰੇ ਚਾ ਗਿਆ ਪਰ ਸਭ ਤੋਂ ਸੁਪੀਰੀਅਰ ਗਿਆਨ ਹੈ ਆਤਮ ਗਿਆਨ ਤੂੰ ਗਿਆਨ ਤੇ ਗੱਲ ਹੈ ਬੁੱਧੀ ਘੋਟ ਬੁੱਧੀ ਤੋਂ ਵੀ ਪਰੇ ਦੀ ਗੱਲ ਹੈ ਇਹ ਜਿਹੇ ਹਿੰਦੀ ਨੂੰ ਸਭ ਚਾ ਗਿਆ ਉਹਦੇ ਤੇ ਫਿਰ ਥੱਲੇ ਤੇ ਗਿਆ ਮੈਂ ਹੋਰ ਫਿਰ ਅੱਗੇ ਨਹੀਂ ਚੜਦਾ ਅਗੇ ਕੋ ਸੱਚ ਦਾ ਰੰਗ ਚੜ ਗਿਆ ਫਿਰ ਉਹ ਜੋ ਸੱਚੇ ਸਤ ਸਰੂਪ ਹੋ ਜਾਂਦਾ ਉਹ ਉਹਦਾ ਆਪਣਾ ਰੂਪ ਰੇਖ ਜਿਹੜਾ ਸਿਉ ਲੱਗਾ ਨਹੀਂ ਕੂੜ ਠੱਗੀ ਗੁੱਜੀ ਨਾ ਰਹੇ ਕੂੜ ਮੁਲੰਮਾ ਪਲੇਟ ਕਰੇ ਦੇਖੋ ਉਹ ਇੱਕ ਪਾਸੇ ਤਾਂ ਸੱਚ ਦੀ ਗੱਲ ਕਰੀ ਐ ਰੰਗ ਦੀ ਗੱਲ ਕਰੀ ਐ ਉਹ ਤਾਂ ਗੁਰਬਤ ਐ ਜੇ ਸੱਚ ਦਾ ਰੰਗ ਚੱਲ ਜੇਵੇ ਤਾਂ ਸੱਚ ਆਉ ਕਹਿੰਦੇ ਨੇ ਤੋਂ ਸਾਚੇ ਜਿਵੇਂ ਜਿਹੜਾ ਕੱਪੜਾ ਉਹ ਰੰਗ ਵੀ ਉਹਦੇ ਚੋਂ ਰੰਗਦਾਰੇ ਪਾਣੀ ਨਿਕਲ ਐ ਸੱਚ ਉਹਦੇ ਵਿੱਚੋਂ ਮਤਲਬ ਦੂਰ ਦੂਰ ਫਾਇਦੇ ਜੋ ਬਸ ਭਾਡੇ ਦੇ ਵਿੱਚ ਉਹ ਹੀ ਬਾਤ ਕਰ ਲਈਏ ਦੋ ਕਹਿਣ ਦਾ ਮਤਲਬ ਪਤਾ ਹੈ ਵੀ ਹਿਰਦੇ ਚੋ ਗਿਆਨ ਹੈ ਜਿਹੜਾ ਗਿਆਨ ਕਿਸੇ ਦਾ ਗਿਆਨ ਹਿਰਦੇ ਚ ਮਤਲਬ ਤਰਮ ਤਰ ਹੋ ਗਿਆ ਉਹ ਗੁਰਮਤਿ ਪੈਂਦੀ ਹੈ ਬਾਤ ਬਿਕਰਦੀ ਹੈ ਕੋਈ ਉਹ ਦনিকਾ ਗਿਆਨ ਅਨੁਸਾਰ ਆਤਮ ਗਿਆਨ ਠੀਕ ਹੈ ਸੱਚ ਦਾ ਗਿਆਨ ਜਿੱਥੇ ਸੱਚਾ ਸਰਬ ਸੱਚ ਨਹੀਂ ਕਮਈ ਹੈ ਉੱਥੇ ਨਾਲ ਫਿਰ ਕੂੜ ਹੈ ਝੂਠ ਜਿਵੇਂ ਅਸੀਂ ਕਹਿੰਦੇ ਚੱਲੇ ਵੀ ਪਰਮੇਸ਼ਰ ਦਾ ਪਿਆਰ ਵੀ ਜਿਹੜਾ ਹੈ ਇਹ ਤਾਂ ਆਖਰ ਤੱਕ ਆਖਰ ਦੇਖੀ ਤਰਾਜ਼ ਸਮਝਾ ਦਿੰਦੀ ਹੈ ਨਰਾਕਾਰ ਕੀ ਹੁੰਦਾ ਜਿਨਾ ਜੇ ਸਮਰੱਥਾ ਹੈ ਦੀ ਗਿਆਨ ਹੈ ਦੀ ਉਹ ਫਿਰ ਕਿਤੇ ਨਾ ਕਿਤੇ ਜਾ ਕੇ ਆਦਮੀ ਨਾਲ ਜੋੜ ਦਿੰਦੇ ਸੀ ਗੁਰਤੀ ਨਾਲ ਜੋੜ ਬੰਦੇ ਦੇ ਗੌਰ ਇੱਕ ਖੁਦਾ ਇੱਕ ਹੈ ਫਿਰ ਵੀ ਆਪਣੇ ਆਪਣੇ ਖੁਦਾ ਦੇ ਆਪਣੇ ਆਪਣੇ ਗੌਰ ਨੇ ਵੇਖੀ ਗੱਲ ਉਹ ਜੇ ਇੱਕਾ ਫਿਰ ਆਪਣੇ ਆਪਣੇ ਕਿਵੇਂ ਜਦੋਂ ਨਾ ਪਤਨਾ ਕਿਤੇ ਕਬੀਏ ਦੋ ਤੇ ਇਤਨੀ ਸੋਜੀ ਧੂਈ ਕਰ ਸਕਦੇ ਇਹ ਹਾਲਤ ਹੈ ਹਰ ਕੋਈ ਇਹ ਟੌਪ ਦੀ ਕਲਾਸੀ ਬੁੱਧੀਵੰਦੀ ਦਾ ਖਦਾਜਲੇ ਸਮਝਦੇ ਹੋ ਪਰ ਮਤਲਬ ਕਿਰਲੇ ਦੇ ਤਾਂ ਹੀ ਰੇਡ ਬਿਰਲੇ ਨਹੀਂ ਕਰੇ ਹਾਂਜੀ ਹਾਂਜੀ ਰੰਗ ਚਲੂਲੇ ਪ੍ਰੇਮ ਲੱਭਦੀ ਪਈ ਨਾ ਅਸਲ ਦੇ ਵਿੱਚ ਰੰਗ ਉਝੋ-ਚੋਗਾ ਨਾ ਫਿਰ ਉਝੋ-ਦੋਲ ਦਰਾਂ ਨੂੰ ਇਹ ਹਾਂਜੀ ਕੂੜ ਠੱਗੀ ਕੁਜੀ ਨਾਰ ਹੈ ਕੂੜ ਪਲੇਟ ਤਰੇ ਜਿਵੇਂ ਆ ਪਕੂੜ ਜਿਵੇਂ ਗੋਟਾ ਨੇ ਕੂੜ ਦੇ ਕੱਪੇ ਨੋਨ ਕਾਉਂਦ ਸੱਕਰੇ ਉਹ ਆਦਮੀ ਦੀ ਹਵਸਤਾ ਜਿਵੇਂ ਕਵੀ ਦੀ ਹਵਸਤਾ ਇੰਨੀ ਉੱਚੀ ਹੋਗੀ ਉਹਨਾਂ ਨੂੰ ਲੱਗਣ ਲੱਗਿਆ ਵੇ ਮਹਾਰਾਜ ਜਿਹੜਾ ਮੈਂ ਤੁਹਾਨੂੰ ਤਰਬੁੱਦੀ ਤੇ ਦੱਸਿਆ ਸੀ ਬੰਦਿਆਂ ਨੇ ਇਹਨਾਂ ਨੂੰ ਮੈਂ ਬਹੁਤ ਰੈਸਟ ਨੂੰ ਸੀ ਉਹ ਮੇਰੇ ਦੋਸਤਾ ਥੱਕੀ ਹੋਊ। ਭਾਵੇਂ ਮੈਨੂੰ ਜਿਹੜੀ ਗੱਲਾਂ ਕਹਿਈਆਂ ਸੀ ਉਹ ਤਾਂ ਪ੍ਰਾਪਤੀ ਹੋ ਗਈ ਤਾਂ ਉਹ ਕਿਤੇ ਜਾ ਕੇ ਖੜ ਗਿਆ ਰੁਕ ਗਿਆ। ਉਹ ਫਿਰ ਉਹਨਾਂ ਨੂੰ ਕੀ ਕਹਿ ਰਿਹਾ ਕਿ ਜਿਹੜੇ ਭੁੱਖੇ ਭਗਤ ਨੇ ਕੀਤੇ ਐ ਮਾਲਾ ਆਪਣੀ। ਜਿਹਨਾਂ ਨੂੰ ਮਾਇਆ ਦੀ ਭੁੱਖ ਜਿਹਨਾਂ ਦੇ ਅੰਦਰ। ਉਹ ਕੀ ਝੂਠ ਬੋਲਣਗੇ? ਕੋਟ ਥਗੀ। ਜਿਹਨਾਂ ਲੋਕ ਦਰਸ਼ਨ ਕਰਾਉਣ ਦੇ ਜੋਰ ਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ। ਇਕ ਤਰ੍ਹਾਂ ਆਪਣੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੀ ਕੀ ਹੋਇਆ ਸਾਦ ਕੀ ਕਰਦੇ ਰਹੇ ਆ ਹੋਰ ਮਤਾਂ ਨੇ ਕਰਦੇ ਨੇ ਝੂਠ ਸਾਬਤ ਹੋਏ ਜਾਂਦਾ ਕਿਸੇ ਪਲੇਟ ਧਰੇ ਅਜਿਹਾ ਕੂੜ ਜਿਵੇਂ ਬਰਮਾ ਥੱਲੇ ਕੁਝ ਹੋਰ ਹੈ ਜਦੋਂ ਦੂਆ ਨੂੰ ਪਤਾ ਲੱਗ ਜੂਗਾ ਜਾਂ ਥੱਲੇੋਂ ਨਿਕਲੇ ਆਊਗਾ ਹੋਰ ਕੁਝ ਕੋਈ ਬੁਲੰਬਾ ਉਹ ਬੁਲੰਬਾ ਕਹਿੰਦੇ ਨੇ ਥੋੜਾ ਚਾਲ ਚੜ ਦਿੰਦੇ ਜੇ ਬੱਤਣਾ ਤੂੰ ਕਰੇ ਆ ਚਾਲ ਸਰਕਲ ਹੀ ਚੜ ਜਿਹੜਾ ਉਹ ਬੁਲੰਬਾ ਜੀ ਬੱਤਾਂ ਥੱਕ ਹੈ ਥੋੜਾ ਬਹੁਤ ਜ਼ਰੂਰ ਜਿੱਥੇ ਸਾਰੀ ਉਹ ਤਾਲੂ ਤੂੰ ਵੀ ਸਕਦੇ ਜੇ ਲੋ ਜਿੰਨਾ ਕਿਸੇ ਕੋਲ ਸੱਚ ਹੈ ਜਿੰਨਾ ਗਿਆਨ ਹੈ ਉਹ ਨਾ ਕੋਲ ਦੇ ਤਾਂ ਬਾਕੀ ਕੋਈ ਸਾਡੇ ਕਰਨ ਵਡਿਆਈਆਂ ਕੂੜੇ ਸਿਉ ਲੱਗਾ ਨਹਿ ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ ਉਹ ਜਿਹੜੀ ਵਡਿਆਈ ਕਰਦੇ ਸੱਚ ਦੇ ਨਹੀਂ ਕਰਦੇ ਮਾਇਆ ਦੀ ਵਡਿਆਈ ਕੌਣ ਬਣਾ ਮਾਇਆ ਵਡਿਆਈ ਇਹ ਬਿਜੂਰ ਪਨੈ ਉਹ ਬਿਜੂਰ ਦੇ ਸਰੀਰ ਦੇ ਉੱਤੇ ਜਿਹੜੇ ਹਾਰ ਹੂਰ ਪਹਿਨਦੇ ਨੇ ਇਹਦੇ ਬੁਗਟ ਪਹਿਨਦੇ ਉਹਦੀ ਗੱਲ ਕਰਦੇ ਨੇ ਇਹ ਕੱਤ ਗਿਆ ਇਹਦੇ ਵਿੱਚ ਉਹ ਬਸ ਐਜੇ ਗੁਣਗਾਨ ਕਰਦੇ ਸੀ ਬੰਦੇ ਦੇ ਰਾਜੇ ਤੇ ਇਹ ਸੰਤਾਂ ਨੇ ਆ ਇਹ ਆਪਣੇ ਜਿਵੇਂ ਅਸੀਂ ਗੁਣਗਾਨ ਕਰਦਾ ਹੀ ਗੁਣਗਾਨ ਕਰਨ ਲੱਗ ਗਏ ਆ ਆ ਨਾਮ ਕੀ ਕਹੇ ਅਸੀਂ ਕੀ ਕਰਦੇ ਹਾਂ ਇਹ ਜਿਹੜਾ ਰਸਤਾ ਹੈ ਇਹ ਸਾਨੂੰ ਫਿਰ ਬਾਯਾ ਵੱਲ ਲੈ ਜਾਂਦਾ ਗੁਰੂ ਸਾਹਿਬ ਤੋਂ ਵਰਜੀ ਦੀ ਜਬੀ ਇਹ ਨਹੀਂ ਕੰਮ ਕਰਦੀ। ਕਰਦੀ ਨੇ ਉਹ ਫਿਰ ਕੋਟ ਵੀ ਕਰਦੇ ਮਾਇਆ ਦੀ ਭੁੱਖ ਦੇ ਅੰਦਰ ਉਹ ਆਪਣੀ ਕਮੇ ਨੂੰ ਰਖਉਂਦੇ ਨੇ। ਲਖੋਗੇ ਝੂਠ ਬੋਲਣਾ ਪੈਂਦਾ। ਆਹ ਕੁਝ ਬੁੱਤਾਂ ਦੇ ਹੈ, ਜੀਵ ਦੇ ਵਿੱਚ। ਇਹਦੀ ਗੁੱਝਾ ਇੱਕ ਗੁੱਝੀ ਗੱਲ ਕਹਿ ਰਹੇ ਨੇ ਗੁੱਝਾ ਜੇ ਇਸ਼ਾਰਾ ਕਰ ਰਹੇ ਨੇ ਐ ਵੀ ਕਹਿ ਰਹੇ ਬਦੂਜਿਆਂ ਮਤਾਂ ਖੋਟ ਗਿਆ ਮੈਂ ਝੂਠ ਹੈ ਫਲਦ ਬਹੁਤ ਗੱਲ ਹੈਤੀ ਬਹੁਤ ਗੁੱਝੀ ਕਹਿਤੀ ਰਮ ਜਾਇ ਇਸ਼ਾਰਾ ਗੱਲ ਗੁੱਝਣ ਵਾਲੀ ਹੈ ਆਪੇ ਨਜ਼ਰ ਕਰੇ ਆਹ ਰੋਕਨੇ ਸੱਚਾ ਆਪ ਹੈ ਉਹ ਕਿਰਪਾ ਕਰੇ ਤਾਂ ਜਲ ਵਰ੍ਹਦੀ ਹੈ ਇਹ ਗੱਲ ਇਸ ਕਰਕੇ ਜਿਹੜੀ ਪਰਮੇਸ਼ਰ ਦੀ ਬਣਾਈ ਹੋਈ ਚੀਜ਼ ਹੈ ਉਹਦੇ ਨਾਲ ਦੀ ਅਸੀਂ ਜੁੜਨਾ ਸਰੀਰ ਜਿਹੜੀ ਮਾਇਆ ਹੈਗੀ ਹੈ ਤਾਂ ਪਰਮੇਸ਼ਰ ਦੀ ਬਣਾਈ ਹੋਈ ਹੈ ਹੁਕਮ ਦੀ ਘੜੀ ਹੋਈ ਹੈ ਤਾੜਤ ਆਤਮਾ ਵੀ ਪੈਦਾ ਕੀਤੀ ਜਾ ਸਕਦੀ ਹੈ ਆਤਮਾ ਪੈਦਾਰੀ ਹੋਈ ਹੋਈ ਕਦੇ ਸਦਾ ਰਹੇ ਜੀ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਜੇ ਸੱਚ ਬਤਾਰੂ ਸੱਚ ਨਾਲ ਜੁੜਨ ਵਾਲੀ ਸੰਗਤ ਹੈ ਸੱਚ ਦੀ ਗੱਲ ਕਰਦੇ ਨੇ ਜੇ ਗੁਰਮਤਿ ਫਸਦੀ ਗੱਲ ਸਤ ਸੰਗਤ ਦੇ ਉਸਤਤ ਕੀ ਨਹੀਂ ਹੈ ਕੀ ਉਸਤਤ ਹੈ ਇਸ ਹਾਂਜੀ ਸੰਗੀ ਸਾਧੂ ਮਿਲੇ ਪਿਆਰੇ ਸੰਗੀ ਜਦ ਇਹਦੇ ਨਾਲ ਜੁੜ ਜਾਂਦੇ ਨੇ ਸੱਚ ਨਾਲ ਨੇ ਆਪਣੇ ਵਿੱਚ ਕੀ ਵੀ ਧਾਰੇ ਜੁੜ ਜਾਂਦੇ ਨੇ ਹੋ ਜਾਂਦੇ ਸੀ ਪਹਿਲਾਂ ਸਾਰੇ ਇੱਕ ਤੋਂ ਜੁੜੇ ਹੋਏ ਤੇ ਨਾਲ ਜੁੜੇ ਜਦੋਂ ਸਵਾਰਥੀ ਹੋ ਗਏ ਸਭ ਉੱਥੇ ਤੇੜ ਪੈ ਗਏ ਉਹਏ ਪੁਰਖ ਪੁਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰਉਪਕਾਰੀ ਆਹ ਜਿਹੜੇ ਪੁਰਖ ਦੇ ਆਹ ਜਿਹੜੇ ਜਨ ਬੁਲਿਆ ਹੋਏ ਉਹ ਵੀ ਕੱਢ ਦੇ ਜਿਹੜੇ ਸੱਚ ਦਾ ਉਪਦੇਸ਼ ਕਰਦੇ ਨੇ ਸੱਚ ਦਾ ਉਪਦੇਸ਼ ਕਰਨਾ ਬੜਾ ਔਖਾ ਹੈ ਜਿ ਸਵਾਰਥੋਂ ਫਿਰ ਸੱਚ ਦੇ ਉਪਦੇਸ਼ ਕਰਨ ਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਹਰ ਜੇ ਦਾ ਗੱਲ ਨਹੀਂ ਕਰ ਸਕਦੇ ਦੇ ਵਿੱਚੋਂ ਹੰਕਾਰ ਨੇ ਪਹਿਲਾਂ ਤਾਂ ਉਹ ਜਿਹੜੇ ਨੇ ਜੇ ਉਹ ਗੱਲ ਕਰੀਏ ਉਹ ਕਹਿੰਦੇ ਨੇ ਸਾਡੇ ਵੱਲੋਂ ਉੱਪਰ ਹੀ ਆ ਅੰਤਾਰ ਦੀ ਤੇ ਖਲਾਸ ਵਾਲੀ ਕੌਣ ਵੜਾ ਮਾਇਆ ਵਧਾਈਏ ਜੇ ਉਹਨੇ ਦੀ ਵਿਆਖਿਆ ਕਰੀਏ 2 ਵੋਲਟਾਂ ਜਨ ਹਲ ਲੈਵਲ ਆਈ ਕਰਮਾ ਤੇ ਕਹਿੰਦੀ ਹੈ ਜੇ ਉਹ ਕਹਿੰਦੇ ਨੇ ਜੀ ਸਾਨੂੰ ਛੋਟਾ ਕਹਿੰਦੇ ਨੇ ਉਹ ਪ੍ਰਚਾਰ ਕਹਿੰਦੇ ਨੇ ਜਿਹੜੇ ਸਾਨੂੰ ਗਿਰਦੇ ਨੇ ਫਿਰ ਸਾਨੂੰ ਸੁਣਦੇ ਨੇ ਉਹ ਕਹਿੰਦੇ ਨੇ ਗੱਲ ਤਾਂ ਹੈ ਅਸੀਂ ਉੱਥੇ ਵੀ ਕਰ ਸਕਦੇ ਪ੍ਰੋਬਲਮ ਹੋਦੀ ਹੈ ਗੱਲ ਕਰੀਏ ਕੋਈ ਜਦਾਰੇ ਉਹਨੂੰ ਬਾਲ ਬੱਚੇ ਪਾਲਦੇ ਜੇ ਆਪ ਜਾਂਦੇ ਜਾਏ ਉੱਤਰ ਉਹਨੇ ਮਜਬੂਰੀ ਇਹ ਨਹੀਂ ਪਰ ਜਿਹੜੇ ਕਰਦੇ ਨੇ ਠੀਕ ਹੈ ਜਿਹੜਾ ਕੀਤੀ ਹੈ ਕੀ ਕੀ ਗੁੱਸੇ ਪਈਆਂ ਰਹੀ ਉਹ ਆਪਣੇ ਕੋਲ ਇਤਹਾਸ ਤੇ ਤਵੀਰ ਦਾ ਦੇ ਬੂਰੇ ਸਿੱਟਿਆ ਗਿਆ ਨਾਬਦੇਵ ਦਾ ਵੀ ਪਿਆਰ ਰੂਪਨਰਾ ਦਾ ਵੀ ਉਹ ਹਿੱਸਤੀ ਸਾਡੀ ਉਹ ਕਿ ਇਹਨਾਂ ਦੀ ਗੁਰਮਖੀ ਦੀ ਹਿੱਸਤੀ ਦੇ ਤੇ ਜਿਹੜਾ ਫੱਡ ਕੇ ਕੋਤਾ ਉਹਨਾਂ ਨੇ ਜੇ ਪਹਿਲਾ ਬਾਣ ਸਬੂਦ ਸੁਬਾਣ ਨੇ ਖਬੂਦ ਲੈ ਕੇ ਸੱਚਾ ਦੇ ਪਾਸੇ ਜਾਣ ਜੀਵ ਰੂਹੀ ਕਾੜ ਸੰਸਾਰੀ ਜੀਵੰਦੀ ਆਸਰ ਦੇ ਠੀਕ ਹੈ ਜੀ ਸੱਚਾ ਹਰ ਨਾਮ ਦਰਵਾਜ਼ਾ ਮੈਂ ਹਰ ਨਾਮ ਸੁਣਾਵਾਂ ਹਰ ਨਾਮੇ ਜਗ ਨਿਸਤਾਰਿ ਕਿਹੜਾ ਹਰਤਾ ਨੂੰ ਜਦ ਹੀ ਹਰ ਕੀ ਹੈ ਇਹਦਾ ਗਿਆਨ ਵੀ ਸੋਝੀ ਹੈ ਹਰ ਨਾਮ ਕਹਿੰਦੇ ਹਰ ਕੀ ਹੈ ਜੇ ਵੀ ਸੋਝੀ ਤੇਰੇ ਉੱਦਰ ਅਸਲ ਤੇਰਾ ਮੂਲ ਹਰ ਹਰ ਜਿਓ ਗੋਪਾਲ ਬਾਜਾ ਪੋਪਨ ਪੁਜਾਇਆ ਇਹ ਵਿਦਾਕਾਰ ਤੋਂ ਆਪਈਏ ਭਾਈ ਆਤਮ ਤਰਸੂ ਚੱਲਣਾ ਅਸਲ ਵਿੱਚ ਬਾਹਲਾ ਸਰੀਰ ਤਾਂ ਉਹ ਸਰੀਰ ਦਾ ਪਕੜਾ ਹੈ ਉਹ ਪਕੜਾ ਬਾਹਲਾ ਜਿਹੜਾ ਕਰਾਉਂਦੇ ਦੀ ਜਾਣ ਆਉਂਦੇ ਵੀ ਇਹੀ ਤੇ ਹੋ ਨਾਲ ਨਾਲ ਜਿਹੜਾ ਕਰਾਉਂਦੇ ਹੋ ਲੋਕਾਂ ਨੂੰ ਸੁਣਾਉਂਦੇ ਤਾਂ ਹੋਊਗਾ ਹਾਲਾਤੇ ਜਗਨਿਸ਼ਤਾਰੀ ਆਹ ਇਹਦੇ ਨਾਲ ਜੱਗ ਜਿਹੜਾ ਵੀ ਇੱਥੋਂ ਤਰਿਆ ਹੈ ਸੰਸਾਰ ਚੋਂ ਕਿਸੇ ਗਿਆਨ ਤੇ ਬਣਾ ਤਰਿਆ ਹੀ ਨਹੀਂ ਹੈ ਇਹਦੇ ਜੇ ਰੋਸ਼ਨੀ ਇੰਨੀ ਹੈ ਜਿਹੜਾ ਭਰਮ ਦਾ ਨਾਸ ਕਰਦਾ ਹੈ ਠੀਕ ਹੈ ਜੀ ਪੂਰੇ ਭਰਮ ਦਾ ਨਾਸ ਹੀ ਕਰ ਸਕਦਾ ਹੈ ਮੇਰਾ ਸਭ ਦਾ ਦੁੱਖ গোਵਾਏ ਜਿਉ ਟੋਟਲ ਨਾ ਟੋਟਲ ਦੁੱਖ ਕਿਤੇ ਜਾਂਦਾ ਦੁੱਖ ਧੜ ਜਰੂਰ ਹੈ ਦੂਜੇ ਤਰਫੋਂ ਨਾਲ ਬਮਾਰੀ ਘਟਦੀ ਜੂੜਾਪੁਰ ਪੂਰੇ ਦੀ ਪੂਰੀ ਜਿਹੜੀ ਹੈ ਜਦੋਂ ਨਹੀਂ ਜੋਦੀ ਹਾਂਜੀ ਗੁਰ ਵੇਖਣ ਕੋ ਸਭ ਕੋਈ ਲੋਚ ਹੈ ਨਵਖੰਡ ਜਗਤ ਨਮਸਕਾਰ ਆ ਹਾਂ ਗੁਰ ਦੇਖਣ ਕੋ ਸਾਰੇ ਲੋਜਦੇ ਉੱਠਾਵੇ ਤਾਂ ਆਪਣਾ ਜਿਹੜਾ ਦੇਖ ਲਾ ਜੱਲਾ ਤਾਂ ਸਾਰੇ ਕਰਦੇ ਨੇ ਲੋਜ ਦੇ ਗੁਰ ਦੇਖਣ ਕੋ ਸਭ ਲੋਜਦੇ ਅਰੋਂ ਅਖਲਾਂ ਦੇ ਵਿੱਚ ਜਿਹੜਾ ਸੰਸਾਰ ਹੈ ਸਾਰੇ ਧੰਬੂ ਗੱਲ ਤਾਂ ਉਹੀ ਲੈ ਕੇ ਚੱਲਦੇ ਨੇ ਬਹੁਤ ਦਿੱਕਾ ਦੇ ਦਰਸ਼ਨ ਦੀ ਗੱਲ ਹੈ ਪਰ ਵਿਚਾਰੇ ਉਹਨਾਂ ਨੂੰ ਕੀ ਕਹਨੂ ਕਿੱਥੋਂ ਕਦੇ ਕਦੇ ਸੋਚੀ ਕੋਈ ਪੈਦਾ ਹੁੰਦੇ ਨੇ ਉਹ ਫਿਰ ਦੱਸਦੇ ਜੀ ਤੁਹਾਨੂੰ ਕੋਈ ਪਤਾ ਲੱਗ ਜਾਂਦਾ ਫਿਰ ਉਹ ਜਿੱਦ ਸਮਝ ਲੈਦੇ ਨੇ ਗੱਲ ਉਹ ਗਾਣਾ ਨਿਕਲ ਜਾਂਦੇ ਨੇ ਉਹਨਾਂ ਦੇ ਬਾਅਦ ਪੂਰੀ ਸਮਝ ਆਉਦਾ ਕੋਈ ਰਹਿੰਦਾ ਸੀ ਫਿਰ ਬਰਬੂਤੇ ਜਿਹਾ ਰਹਿੰਦਾ ਇਹ ਗੱਲ ਫਿਰ ਕੋਈ ਨੂੰ ਕੋਈ ਕਿਰਤੇ ਕਿਰਪਾ ਹੋ ਜਾਂਦੀ ਹੈ ਜੀ ਵੀ ਡਿਵੈਲਪ ਆਪੇ ਆਪ ਰੱਖਿਆ ਸਤਗੁਰੂ ਵਿੱਚ ਗੁਰ ਆਪੇ ਤੁਧ ਸਵਾਰਿਆ ਜਿਹੜਾ ਪਰਵੇਸ਼ ਹੈ ਉਹਨੇ ਆਪਣਾ ਆਪ ਸਤਗੁਰੂ ਦੇ ਵਿੱਚ ਰੱਖਿਆ ਹੋ ਆਪਣਾ ਆਪਾ ਪਰ ਤੇ ਉਹਦੇ ਵਿੱਚ ਰੱਖਿਆ ਹੋਇਆ ਆ। ਆਪਨੇ ਵੀ ਦਾ ਆਪ ਵੀ ਦੀ ਦਾ ਬੋਲਣ ਵਾਲਾ ਦੀਦਾ। ਰੋਪਨ। ਲੋਕੋ ਸਿਰੂ ਗਈ ਜਾਂਦੇ ਨੇ ਗੁਰੂ ਆ ਉਹ ਕਹਿੰਦਾ ਮੈਂ ਗੁਰੂ ਗੁਰੂ ਦਾ ਬੋਲਣ ਵਾਲਾ ਮਹਿਲੂ। ਮੈਂ ਤਾਂ ਦਾਸ ਹਾਂ। ਪਰ ਹੁਣ ਸਾਨੂੰ ਜਿਹੜਾ ਦੀਦਾ ਸੀ ਕਹਿੰਦੇ ਚੱਲ ਯਾਰ ਛੱਡੋ ਪਰੇ ਹੁਣ ਸਾਨੂੰ ਸਾਡੇ ਖਾਤਰ ਗੁਰੂ ਹੋ ਉਹਦੇ ਵਿੱਚ ਉਹਦੇ ਵਿੱਚ ਗੁਰਮੁਖ ਜਿਹੜਾ ਹੈ ਉਹਦੇ ਵਿੱਚ ਉਹ ਫਰਗਟ ਸੰਤ ਆਪੇ ਫਰਗਟ ਹੁੰਦਾ ਗੁਰ ਆਪੇ ਤੁਧ ਸਵਾਰਿਆ ਜਿਹੜਾ ਗੁਰ ਹੈ ਗਿਆਨ ਤੇ ਤੇ ਗੁਰ ਗੁਰੂ ਨਹੀਂ ਆਇਆ ਹੈ ਲੱਭ ਜਿਹੜਾ ਕਰਾ ਰਿਹਾ ਗੁਰ ਹੈ ਗੁਰਦੇਵ ਹੈ ਗੁਰੂ ਸਵਾਰਿਆ ਤਾਂ ਆਪ ਸ਼ਬਦ ਗੁਰੂ ਨੇ ਸਵਾਰਿਆ ਉਹ ਉlijke ਹਰ ਟਾਈਮ ਕੁੜੀ ਕਦੀ ਕਿ ਪਰ ਉਹਨਾਂ ਚਲਦੀ ਘੜੀਆ ਹੋਈ ਇੱਥੇ ਪੌੜੀਆਂ ਚੜਾ ਕੇ ਦੀ ਆਦਮੀ ਵੀ ਹੁਕਮ ਤੋਂ ਬਾਹਰ ਜਾਣ ਦੀ ਇੱਛਾ ਕਰਦੇ ਆ ਇਹ ਬਾਕੀ ਜੀਵਾਂ ਨੂੰ ਜ਼ਿਆਦਾ ਸਿਆਣਾ ਹੋ ਜਾਂਦੇ ਠੀਕ ਹੈ ਜੀ ਤੂੰ ਆਪੇ ਪੂਜੈ ਪੂਜ ਕਰਾਵੇਂ ਸਤਿਗੁਰ ਕੋ ਸਿਰ ਸਿਰ ਜਹਾਰਾ ਜਿਹੜਾ ਹਟਾ ਉਹ ਸਾਰਿਆਂ ਤੇ ਪੂਜਾ ਪਰਵਾਰ ਹੈ ਜਦੀ ਪੂਜਾ ਦੇ ਤਾਂ ਬੋਲ ਤਾਂ ਸਭ ਪਾਈਆ ਜਲਮਨ ਅਰਪਨ ਪੂਜਿਟਣੋਂ ਤੂੰ ਆਪੇ ਐਸੀ ਸਿੱਖਿਆ ਦਿੰਦੇ ਐਸੀ ਮੁੱਢ ਫਿਰ ਜਾ ਕੇ ਉਹ ਤਰਵੰਤ ਜਿਹੜਾ ਹੈ ਗੁਰਬੇਚੇ ਸਤਗੁਰ ਦੇ ਪਾਸ ਠੀਕ ਹੈ ਪਰਮੇਸ਼ਰ ਉਹ ਗਿਆਨ ਦੇ ਰਿਹਾ ਜੀ ਹਾਂ ਪਰਮੇਸ਼ਰ ਐਸਾ ਗਿਆਨ ਦਿੰਦਾ ਹੈ ਐਸੇ ਉਹਦੇ ਥ्रू ਬੋਲ ਕੱਢਦਾ ਕਿ ਉਹ ਗੱਲ ਨਾਲ ਬਹੁਤ ਹੈ ਕਿ ਲੋਕ ਆਪਣਾ ਪਿਆਰ ਹੋ ਜਾਂਦੇ ਐਸਾ ਪ੍ਰਭਾਵ ਪੈਂਦਾ ਹੈ ਉਹਨਾਂ ਬੋਲਾਂ ਦਾ ਕਿ ਉਹ ਬਿਲਕੁਲ ਪਲਟ ਜਾਂਦੀ ਬੋਲਾਂ ਕੀ ਸ਼ਕਤੀ ਹੈ ਹਾਂ ਹਾਂਜੀ ਤੂੰ ਆਪੇ ਪੂਜੇ ਪੂਜ ਕਰਾਵੇਂ ਸਤਿਗੁਰ ਕੋ ਸਿਰਜਣਹਾਰਿਆ ਇੱਥੇ ਸਿਰਜਣਹਾਰਾ ਕੌਣ ਹੈ ਜੀ ਸਿਰਜਣਹਾਰਾ ਪ੍ਰਮਾਤਮਾ ਹੈ ਅੱਛਾ ਜੀ ਸਤਿਗੁਰ ਘਰਤ ਘੜੀ ਹੈ ਜਿਹੜਾ ਸਿਰਜਦਾ ਸ਼ਬਦ ਦੇ ਸਿਰਜਿਆ ਸਭ ਕੁਝ ਠੀਕ ਹੈ ਕੋਈ ਸਤਿਗੁਰ ਜੀ ਅਸੀਂ ਦੋ ਜਿਹੜਾ ਸੱਚ ਜਣਾ ਦਾ ਹੈ ਕਿ ਦੁਨੀਆਂ ਦੇ ਭਾਇਆ ਦੇ ਅੰਦਰ ਅੰਦਰ ਪਹਿਲਾਂ ਦੇਖੋ ਵੀ ਇਹ ਨਾ ਸੱਚ ਜਣਾ ਦਾ ਫਿਰ ਸਾਡਾ ਬੂਲ ਬੂਲ ਹੈ ਉਹ ਹੀ ਹੈ। ਬੋਲ ਕੇ ਕਹਿੰਦਾ ਹੈ। ਉਹ ਨਾ ਭਾਇਆ ਦੇ ਵਿੱਚ ਸਰੀਰ ਤੇ ਰਚਿਆ ਦੀ ਹੋਇਆ ਬੂਲ। ਰਚਾ ਆਰਾ ਸੱਚ ਜਣਾ ਦਾ ਲੱਗ ਲੱਗ ਲੱਗਦਾ ਹਾਂਜੀ ਅਲੱਗ ਆ ਰਬਾ ਜਦੋਂ ਇੱਕ ਮਾਣੇ ਜਿੱਤ ਹੋ ਜਾਂਦਾ ਫਿਰ ਜਿੱਤ ਆ ਰਿਆ ਫਿਰ ਜਿੱਤ ਕਰਦਾ ਫਿਰ ਅਗਲੀ ਤੇਜ ਹੋ ਤੀ ਕਿਉਂ ਕਿ ਕੋਈ ਤਾਂ ਉੱਗਦਾ ਜਾਂ ਜਿੱਤੇ ਹੋ ਜਾਂਦਾ ਫਿਰ ਉੱਗਦਾ ਕੀ ਵਾਲਾ ਉੱਗਦਾ ਹਸ਼ਬ ਦੇ ਨਾਲ ਫਿਰ ਸਿੱਧਾ ਸਿੱਧੀ ਬਾਣੀ ਧੁਰਕੀ ਬਾਣੀ ਤੇ ਫਿਰ ਹੋਂਦ ਨਾਲ ਜਿਵੇਂ ਕਾ ਜੀਵੋ ਰਿਹਾ ਫਿਰ ਹੁਕਮ ਸਰ ਜਲਾ ਰੋਜਾਂ ਤੇ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਇਸ ਕਾਲਾ ਮੂਹ ਜਮ ਮਾਰਿਆ ਆਦੇ ਪਾ ਉਹ ਆਦੇ ਜਿਹੜਾ ਕੋਈ ਬੇਗੁਖ ਹੋ ਜਾਂਦਾ ਨਾ ਸਤਿਗੁਰੂ ਕੋਲ ਵਿਛੜ ਜਾਂਦਾ ਭਾਇਆ ਜੁੜ ਜਾਂਦਾ ਉਹਦਾ ਬੂ ਕਾਲਾ ਹੋ ਜਾਂਦਾ ਉਹਦੇ ਅੰਦਰ ਫੇਰ ਹੋ ਜਾਂਦਾ ਜਦੋਂ ਹੋ ਗਿਆ ਉਹ ਗਿਆਨਤਾ ਛਾ ਜਾਂਦੀ ਹੈ ਜਦ ਹੀ ਕੋਈ ਉੱਤੇ ਸੱਚ ਤੋਂ ਟਟਿਆ ਆ ਗਿਆਨਤਾ ਛਾ ਗਈ ਜੀਵਾ ਬੁਝ ਗਿਆ ਤੇਰਾ ਹੋ ਗਿਆ ਹਾਂਜੀ ਤੇ ਇਸ ਦੀਵਾ ਹੈ ਜੀ ਬਸੇ ਲੇਕਿਨ ਦੀਵਾ ਜਲਦਾ ਹੈ ਜਲਣਾ ਬੁਝਿਆ ਨਹੀਂ ਦਾ ਇਸ ਅੱਗੇ ਪਿੱਛੇ ਨਾਹੀਂ ਗੁਰਸਿੱਖੀ ਸੱਚ ਨਾਲ ਟੁੱਟ ਗਿਆ ਕੋਈ ਕਿਤੇ ਮਿਲਣੀ ਅੱਗੇ ਪਿੱਛੇ ਟੋਈ ਦੋਈ ਨਾ ਅੱਗੇ ਟੋਈ ਹੈ ਦਰਗਾਹ ਜਨਾਈ ਟੇਟੋ ਹੀ ਪਿੱਛੇ ਟੋਈ ਹੈ ਠੀਕ ਹੈ ਜੀ ਉਹ ਸੇ ਕਾਨੇ ਬਚਾਲਦੇ ਆ ਕੋਈ ਨਹੀਂ ਇਸ ਕਰਕੇ ਉਹਨਾਂ ਨੇ ਦੀ ਤਾਂ ਉਹ ਕਰਦੇ ਗਏ ਗੁਰਮਤਿਰ ਗ੍ਰਹਣ ਨੇ ਬਚਾਲ ਲਿਆ ਸੱਤਿ ਦੇਵਟ ਹੋਈ ਦੀ ਬਿੱਲੀ ਕਿਤੇ ਉਹ ਤੇ ਬੈਠੋ ਡਰੇ ਹੋਏ ਤਾang ਉੱਪਰ ਪੈ ਜਵੇ ਤਾਂ ਸਭ ਜੰਮ ਤੋਂ ਬਹੁਤ ਹੀ ਦਰਦ ਕੋਈ ਹੋਰ ਪੈ ਰਦਾ ਹੀ ਨਹੀਂ ਸੰਸਾਰੀ ਸਤ ਗੁਰੂ ਨੂੰ ਜੋ ਮਿਲੇ ਸੇਈ ਜਨ ਉੱਭਰੇ ਜਿਨ ਹਿਰਦੇ ਨਾਮ ਸੁਮਾਰੇ ਫਰੂਰੂ ਮੇਲੇ ਬਿਲਕੇ ਸਤ ਗੁਰ ਨਾਲ ਇਕ ਬਿਠੋ ਕੇ ਸਤ ਦੇ ਸੁਭਾਅ ਵਰਗਾ ਆਪਣਾ ਸੁਭਾਅ ਧਾਰ ਲਿਆ ਜੋ ਸਤਗੁਰ ਦਾ ਸਭਾ ਹੈ ਜੋ ਸਤਗੁਰ ਚਾਹਦਾ ਹੋਵੇ ਚੱਲਦੇ ਨੇ ਫਸ ਜਿਹਨ ਵਿਰਗੇ ਇੱਕ ਹੋ ਗਏ ਜਿਨ ਹਿਰਦੇ ਨਾਮ ਸਮਾਰ ਹੋ ਗਏ ਉਹਨਾਂ ਦੇ ਹਿਰਦੇ ਚ ਨਾਮ ਜਿਹੜਾ ਹੈ ਸਮਾਗਿਆ ਨਾਮ ਦੇ ਕੋਣਾਂ ਦਾ ਸੰਦਾ ਉਜਲਾ ਕਰਤਾ ਸੁਭਾਰ ਦਾ ਜੋ ਉਹਨਾਂ ਦੇ ਅੰਦਰ ਗਲਤੀਆਂ ਟੀਆਂ ਉਹਨਾਂ ਦੇ ਸਾਰੇ ਵਿਚਾਰ ਤੇ ਸਮਾਉਣ ਨਾਲ ਉਹਨੇ ਉਪਨਟੇ ਗਏ ਉਹਨਾਂ ਦੂਰ ਕਰਤੇ ਉਹਨਾਂ ਦੇ ਦੁਹਰੇ ਦੇਣਾ ਪਰਬ ਦਾ ਚੱਕ ਨਾਨਕ ਕੇ ਗੁਰਸਿੱਖ ਪੁੱਤੋ ਹਰ ਜੱਪਿਓ ਹਰ ਨਿਸਤਾਰ ਜਿਹੜੇ ਗੁਰਸਿੱਖ ਨੇ ਸਾਰੇ ਇਹ ਪਰਵੇਸ਼ ਉਹ ਤਾਂ ਖਰੀਦਦਾ ਰੂਏਗ ਬਤਾਇਆ ਕਿ ਕਦਿਆਂ ਬਾਰਖੁੱਤ ਦੇ ਦੇ। ਕਈ ਦੇ ਰਿ। ਪਰ ਸੰਸਾਰ ਨੂੰ ਹਲੇ ਹੈ ਸੰਸਾਰੀ ਇਸ ਕਰਕੇ ਡੱਡ ਬੁਲਾਈ ਬੈਠਿਆਂ ਸੀ। ਸੰਸਾਰੀ ਗੋਲੇ 'ਚ ਬਹੁਤਾ ਪਤਾ। ਜਿਹੜੇ ਸਰੀਰ ਦੇ ਤਲ ਤੇ ਜੀਉਂਦੇ ਨੇ। ਜਿਹੜੇ ਆਤਮਾ ਦੇ ਤਲ ਤੇ ਸਮੇਂ ਦਾ ਜਿਹੜਾ ਗਾਲ ਨੂੰ ਫੇਰ ਗਾਲ ਬਣਦੀ ਹੈ ਇੱਕੋ ਜਿਹਾ ਕਿਸੇ ਹਰ ਜੱਪ ਲੈਓ ਹਰ ਦੂ ਜਾਣ ਲਿਓ ਤੁਹਾਡੇ ਹਰ ਇਹਨਾਂ ਨੇ ਉਹ ਜਾਣ ਲਿਆ ਜੱਪ ਓ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਗੁਰ ਮਿਲੇ ਤਾਂ ਨਦਰ ਹੋਏ ਮਨ ਮੁਖ ਅੰਧ ਅੰਡਿਆ ਸੰਸਾਰ ਕੋ ਲੈ ਆਇਆ ਜਗ ਭੁਲਿਆ ਕਿਉਂ ਹੋ ਗਏ ਵਰੀਏ ਕੁ ਵਰੀਏ ਵੇਗਾ ਗਿਆ ਜਿਆਦਾ ਕੋਪਰੇ ਜਦ ਤੱਕ ਪਹਲਾਇਆ ਕੋਪਰੇ ਜਦ ਤੱਕ ਪਹਲਾਇਆ ਕਪਾ ਹੋਂਦੇ ਨਾਵੇਂ ਨਾਲ ਵਿਰੋਧ ਹੈ ਨਾਵੇਂ ਦਾ ਵਿਰੋਧ ਕੀ ਕਰੀ ਹੋਪ ਹਾਂਜੀ ਜੇ ਆ ਹੈ ਜਿਹੜਾ ਕੱਤ ਗਿਆ ਨੇ ਜਿਹੜੇ ਲੋਕੇ ਬੰਦੇ ਨੇ ਵੀ ਜਿਹੜਾ ਹਰ ਗਿਆਨ ਸਾਰੇ ਗਿਆਨੋ ਦੇ ਵਿੱਚ ਗਿਆਨ ਵੀ ਕਰਦੇ ਨੇ ਜਿਹੜਾ ਗਿਆਨੀ ਉਹਨਾਂ ਹੋ ਜਾਂਦੇ ਨੇ ਠੀਕ ਹੈ ਸਾਰੇ ਗਿਆਨਵਾਨ ਹਾਂਗਾ ਪਰ ਕੱਟ ਗਿਆ ਜੇ ਆਤਮ ਗਿਆ ਇਹ ਹੰਕਾਰੀ ਦੀ ਹੁੰਦਾ ਕੋਈ ਐਸਾ ਕੋਈ ਸਾਬਤ ਕਰੇ ਵੀ ਇਹ ਕੱਟ ਗਿਆ ਹੈ ਦੀ ਨਾ ਹੈ ਦੀ ਸਾਥ ਬੋਲਣ ਵਾਲਿਆ ਰੁਪਏ ਕਹਿੰਦੇ ਰਹਿਦੇ ਹੁੰਦਾ ਨਹੀਂ ਦੇ ਦੇ ਨਾ ਕਰਾਂ ਠੀਕ ਹੈ ਕੋਈ ਹਾਂ ਲਾ ਸਕਦਾ ਤੁਹਾਨੂੰ ਬੇਕੀ ਵੀ ਨਾ ਕੋਈ ਕਿਸੇ ਤੇ ਲਾ ਸਕਦਾ ਪਰ ਰਿਅਲਿਟੀ ਇਹ ਹੈ ਕਿ ਤੂੰ ਸਾਬਤ ਕਰੇ ਵੀ ਜੋ ਰੰਗ ਦੇ ਕਿਹਾ ਗੁਰਬਾਣੀ ਦੇ ਤਾਂ ਸੱਚ ਨਹੀਂ ਹੈ ਜਿੱਤੇ ਸੱਚ ਠੀਕ ਹੈ ਜੀ ਹਮ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਵਿਕਾਰ ਸਤਗੁਰੂ ਮਿਲੇ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਿਆਰ ਦੁਰਮਤ ਮੈਂ ਜੁੜ ਨੇ ਮਿੱਥਿਆ ਭਾਇਆ ਦੀ ਭੁੱਖ ਹੈ ਮਰ ਮਾਇਆ ਦੇ ਸਾਰੇ ਕੱਟਪੁਰ ਹੋਏ ਕਰਨਦਰ ਵਿਦੇ ਕੋਈ ਸਾਤਪੁਰ ਹੋਵੇ ਉਚਾਰ ਦੇ ਵਿੱਚ ਤਾਂ ਕੋਈ ਉਹ ਦੱਸੇ ਸਮਝਾਵੇ ਤਾਂ ਦਾ ਜਗਰ ਦੂਰ ਹੋਵੇ ਉਹਨਾਂ ਜਿਹੜਾ ਤਬ ਜਿਹੜੇ ਧੇਰੇ ਦੇ ਖਾਤਰ ਸਾਰੇ ਚਾਹੁੰਦੇ ਰਹੇ ਜੇ ਜਹਦੀ ਤੁੰਨ ਸੀ ਹੋਇਆ ਹੋਇਆ ਜੀ ਠੀਕ ਹੈ ਕਰਦੇ ਆਪਾਂ ਉਹ ਹਜ਼ਾਰ ਕਰ ਲੈਂਦੇ ਜਿਹਦੀ ਉਹਦੀ ਨਾਨਕ ਆਪੇ ਮੇਲ ਲੈ ਜਿਸ ਨੂੰ ਸ਼ਬਦ ਲਾਏ ਪਿਆਰ। pran kaape mel lae jis ਸਮਝਾਉਣ ਦੀ ਲੋੜ ਹੈ। ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿੱਜੈ ਜਿਨ ਇਕ ਮਨ ਇੱਕ ਅਰਾਧਿਆ ਕਾ ਕੰਧ ਨਾ ਕਬੂ ਛਿੱਜੈ ਠਾਕੀ ਹੈ ਕੀ ਸੱਚੇ ਦੀ ਸਿਫਤ ਸਲਾਹ ਹੀ ਸਕੇ ਗੁਰਬਾਣੀ ਸਿਫਤ ਸਲਾਹ ਹੈ ਸਕੇ ਜੀ ਪਰ ਸੱਚ ਆਇਦਾ ਇਹਦੇ ਵਿੱਚੋਂ ਸੱਚ ਪੈਦਾ ਹੁੰਦਾ ਜਿਵੇਂ ਦੁੱਧ ਬੁੱਧੂ ਪਰਤੇ ਮੱਖਣ ਪਾਚਾ ਦੁੱਧ ਆਇਜਣਾ ਸੁਧ ਬਣਦਾ ਗੁਰਬਾਣੀ ਮੈਂ ਕਹਿੰਦੀ ਪ੍ਰਥਮੇ ਮੱਖਣ ਪਾਚਾ ਦੁੱਧ ਅੱਗੇ ਕਹਿੰਦੇ ਪਹਿਲਾਂ ਦੁੱਧ ਹੈ ਤਾਂ ਮੱਖਣ ਸੱਚੇ ਹੀ ਪੈਦਾ ਹੁੰਦਾ ਗਾਲਿਸ਼ ਤੇ ਪਸ਼ੂ ਆ ਦੇ ਅੰਦਰ ਚਰਮੀ ਹੈ ਪੂਰੀ ਦੁੱਧ ਚਾਹੇ ਫੈਜ਼ਰ ਉੱਪਰ ਜਦ ਹੀ ਉਹ ਫਿਰ ਦੁੱਧ ਤੋਂ ਪ੍ਰਾਪਤ ਦਹੀਂ ਬਣਾ ਦੇ ਪ੍ਰਾਪਤ ਹੋ ਜਾਂਦੀ ਹੈ ਕਿ ਦੁੱਧ ਤੋਂ ਕੱਢ ਪ੍ਰਾਪਤ ਹੋਈ ਜੇ ਜੋ ਦਗਾ ਜੋ ਰਿਹਾ ਹੈ ਉਹ ਕ੍ਰਿਪ ਜਿਹੜਾ ਭੁੱਲ ਕੇ ਦੱਸਿਆ ਸ਼ਾਮ ਦਾ ਕੁਰਬਾਨੀ ਕਾਲੀ ਜੀਓ ਮਕਰ ਤ੍ਰਿਯੰਤੀ ਗੁਰਬਾਣੀ ਆ ਤੁੰਦਾ ਠੀਕ ਹੈ ਮਕਰ ਮੱਖਰ ਸੀ ਇਹ ਵੀ ਕੋਣ ਦੁੱਖ ਨਹੀਂ ਕੋਈ ਕਵਤਨ ਕੋਲ ਮੱਖਰ ਮਿਲਿਆ ਸੀ ਹੂੰ ਹੂੰ ਜੇ ਸਾਨੂੰ ਜੋ ਕਿਹਾ ਪ੍ਰਾਪਤ ਹੋ ਸਕਦਾ ਹੈ ਕੀਤਾ ਜਾ ਸਕਦਾ ਹੈ ਸਾਚੇ ਪ੍ਰਾਪਤ ਹੋ ਸਕਦਾ ਕੀਤਾ ਜਾ ਸਕਦਾ ਹੈ ਸੱਚੇ ਹੀ ਸੱਚ ਪ੍ਰਾਪਤੀ ਹੋਣੀ ਹੈ ਸੱਚ ਕਾਚਾ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਜੈ ਹਾਂ ਉਹ ਸਿਫਤ ਸਲਾਹ ਕਰਦਾ ਜਿਹੜਾ ਸੱਚ ਵਿੱਚ ਭਜੇ ਜਿਹੜਾ ਸਿਫਤ ਸਲਾਹ ਕਰ ਉਹ ਤੁਝੀ ਚੰਗਾ ਹੈ ਜੇ ਭਜਿਆ ਹੋਇਆ ਸਿਫਤ ਸਲਾਹ ਕਰਦਾ ਦੋ ਗੱਲਾਂ ਠੀਕ ਹੈ ਜਿੰਨੀ ਇੱਕ ਮਨ ਇੱਕ ਅਰਾਧਿਆ ਤਿੰਨ ਕਾ ਕੰਧ ਨਾ ਕਬੂ ਖਿਜੇ ਜਿਹਨੇ ਇੱਕ ਵਾਰ ਨੇ ਅਰਾਧ ਲਿਆ ਉਹਨਾ ਦਾ ਕਦੇ ਵੀ ਜੀਤ ਠੀਕ ਹੈ ਕਿੱਦਾਂ ਹੁੰਦਾ ਉਹਨਾਂ ਦੇ ਅੰਦਰ ਪਰਮਾਤਮਾ ਪੈਦਾ ਹੀ ਨਹੀਂ ਹੁੰਦਾ ਉਹਨਾਂ ਦੇ ਅੰਦਰ ਜੋਤਪੂਰਨ ਜੋਤ ਜਗਾ ਘੱਟਨਾ ਉਹਨਾਂ ਦੇ ਹਿਰਦੇ ਜੋਤ ਹਰ ਵਕਤ ਪਰਪਰ ਰਹੀ ਹੀ ਰਹੇਗੀ ਇਹ ਪਰਮਾਤਮਾ ਪੈਦਾ ਹੀ ਨਹੀਂ ਹੋ ਸਕਦਾ ਜੇ ਪਰਮਾਤਮਾ ਉਹ ਛਿੱਟਿਆ ਹੁੰਦਾ ਫਿਰ ਉਹ ਅੱਛਾ ਚੱਲਣ ਚ ਕੰਧ ਦਾ ਬਦਲ ਤੈਨੂੰ ਉਲਟਾ ਲੱਗੂ ਕੰਧ ਖੜੀ ਹੋ ਗਈ ਅੱਲਾ ਰੋਣਾ ਵਾਦੀ ਇਹ ਦੋਲਤਾ ਤੋਂ ਨਹੀਂ ਹੁੰਦੀ ਪੁਰਖ ਸ਼ਾਬਾਸ਼ ਰਸਨਾ ਅੰਮ੍ਰਿਤ ਪਿਜੈ ਹਾਂ ਦੇ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਜਿਹਨ ਦੀ ਸੱਚ ਰਸਨਾ ਪੀਜੀ ਹੁੰਦੀ ਹੈ ਜਿਹੜੇ ਜਿਹੜੇ ਦੇ ਸਾਕਿਟ ਕਰਦਾ ਰਹਦਾ ਉਹਨਾਂ ਦੀ ਆਤਮਾ ਹਰ ਵਕਤ ਸਾਡੇ ਚ ਜੁੜੀ ਜਾਂਦੀ ਹੈ ਕਿਹਦੇ ਰਸਨਾ ਤੋਂ ਭਾਅ ਬੁੱਧੀ ਹੋ ਗਈਆਂ ਜੀ ਆਤਮਾ ਕਹ ਲੋ ਸੱਚਾ ਜਿਨ ਮਨ ਭਾਮਦਾ ਤੇ ਮਨ ਸੱਚੀ ਦਰਗਾਹ ਜੈ ਜਿੱਕਰ ਸੱਚ ਭਾਗਿਆ ਹਾਂ ਗੱਲ ਆ ਗਿਆ ਸੱਚ ਸੱਚ ਮਿੱਠਾ ਲੱਗਿਆ ਕੋਣ ਕੀ ਤਸਾਜ ਕੋਰਣਾ ਲੱਗਦਾ ਨਾ ਹਾਂਜੀ ਤੇ ਤਾਂ ਆ ਗਿਆ ਜੇ ਗੁਰਬਾਣੀ ਮਿੱਠੀ ਲੱਗੀ ਤੇ ਮਨ ਸੱਚੀ ਦਰਗਾਹ ਲਿਜਜੇ ਉਹ ਸੱਚੀ ਦਰਗਾਹ ਤੋਂ ਜਿਆਦਾ ਮੈਂ ਚਲਦੀ ਠੀਕ ਹੈ ਜੀ ਉਹ ਸੱਚੀ ਦਰਗਾਹ ਤੱਕ ਉਹਥੇ ਆਪਣੀ ਜਗਾ ਬਣਾ ਲੈਂਦਾ ਹਾਂਜੀ ਤਨ ਜਨਮ ਸੱਚਿਆਰਿਆਂ ਮੁਖ ਉੱਜਲ ਸੱਚ ਕਰਿਜੇ ਕਰਦਾ ਜਦੋਂ ਮੈਂ ਜਿਹੜੇ ਸੱਚਿਆਰੇ ਬੁਰਾ ਦਾ ਤਾਂ ਜਦੋਂ ਸਫਲਾ ਹੋ ਗਿਆ ਆਪੂ ਖੁਦ ਜੇ ਫੇਰਾ ਗਿਆ ਖੁਦ ਕੋ ਉਹਨਾਂ ਫਸੀਦ ਨੂੰ ਖੁਦ ਜੇ ਕਰਤਾ ਉਹ ਹੀ ਲੈਣਾ ਹਾਂਜੀ